श्लोक कोट दान इस नानंग अनेक शोधन पवित्रत चरनत नानक हर हर रसना सर्व पाप विमुचते पापों को कटना है पापों को खड़ा चढ़ाना है ताबर कला की चाहिए है. दान इस नानंग ना। अनेक शोधन पवित्रत पवित्रता है अनेक प्रकार दे दान करने चाहिए नाम भी दान करना है. ਦੁਆ ਵੀ ਕਰਦੇ ਰਹੋ ਨਾਮ ਤੇ ਬਿਨਾਂ ਗੱਲ ਹੀ ਬੰਡੀ ਕਿ ਸੋਤਾਂ ਤੇ ਪਵਿੱਤਰਤਾ ਇਹ ਹੀ ਪਵਿੱਤਰਤਾ ਹੈ ਇਹ ਵੀ ਇਹ ਜਿਹੜੀ ਜੋ ਕਿਸੇ ਗਿਆਨ ਪਵਿੱਤਰ ਉਹਦਾ ਧਨ ਪਵਿੱਤਰ ਹੋ ਕਹਿੰਦੇ ਘੋੜਿਆਂ ਤੇ ਸੰਤ ਸਿੱਖ ਸੰਤ ਸਵਾਰੀ ਕਰਦੇ ਨੇ ਉਹਦੇ ਘੋੜੇ ਉਹਦਾ ਧਨ ਪਵਿੱਤਰ ਹੋ ਜਾਂਦਾ ਯਾਨੀ ਦਰਗਾਹ ਜਿਹਾ ਮੰਦਿਰ ਹੋ ਜਾਂਦਾ ਉਹ ਹੰਕਾਰ ਨਹੀਂ ਕਰਦਾ ਉਹਦਾ ਚਰੰਤ ਨਾਨਕ ਹਰ ਰਸਨਾ ਸਰਬ ਪਾਪ ਬਿਮੁਚਤੇ ਜਾਨਾ ਪਾਣੀ ਗੁਰੂ ਕਾ ਕਰਤੈ ਵੈ ਸਖੰਦੀ ਹੈ ਐਨਾਂ ਗੈ ਮੈਂ ਕਰਦਾ ਹਾਂ ਆਪਣਾ ਹੀ ਹੈ ਸਭ ਕੁਝ ਉਹੀ ਕਰਾ ਰਿਹਾ ਮੈਂ ਤਾਂ ਨੌਕਰ ਕਰ ਰਿਹਾ ਮਾਲਕ ਉਹ ਹੈ ਧਨਵੰਤ ਧੰਤਾ ਮੇਰਾ ਹੈ ਨਹੀਂ ਉਹਦਾ ਹੀ ਹੈ ਰਸਨਾ ਸਰਬ ਪਾਪ ਬਿਮੁਚਤੇ ਬਾਤ ਜੇ ਰਸਨਾ ਦੇ ਵਿੱਚ ਇਹ ਗੱਲ ਹੈ ਸਾਰੇ ਪਾਪ ਅੰਦਰੋਂ ਨਸ਼ ਹੋ ਜਾਣਗੇ ਫੇਰ ਨਹੀਂ ਕੀਤੋ ਮੂਖਣਾ ਪੋਰੀ ਦਿੱਤਮ ਪਾਹੇ ਪਾਏ ਅੱਗੇ ਨੂੰ ਕਹਿੰਦੇ ਨੇ ਬਹੁਤ ਸਾਰਾ ਇਹਨਾਂ ਨੂੰ ਇਕੱਠਾ ਕਰਕੇ ਥੋੜੀ ਜੀ ਪੋ ਰੱਖ ਜੇ ਅਦਿਤੀ ਸੋਈ ਬੱਝ ਜਾਂਦਾ ਜੇ ਦਾਨਪੁਨ ਬਹੁਤ ਕੁਝ ਕਰਕੇ ਜੇ ਉਹਦਾ ਹੰਕਾਰ ਖਾਲੀ ਸਾਰੇ ਪਾਪ ਖੋਹ ਜਾਂਦਾ ਇਹ ਗਾ ਜੀ ਮਨ ਬਸੰਦ ਲੋ ਸੋ ਨਾਨਕ ਹੱਬੇ ਦੁਖੜੇ ਉਲਾਹੇ ਦੁਖੜੇ ਦੁਖੜੇ ਉਹ ਬੋਲੀ ਸਿੱਧੀ ਬੋਲੀ ਜਿਹੜਾ ਦਖਣੀ ਬੋਲੀ ਹਾਂਜੀ ਬਹੁਤ ਸਾਰਾ ਇਹਨਾਂ ਨਾਲ ਇਕੱਠਾ ਹੋਵੇ ਤਾਂ ਪੂਰਾ ਕੱਗ ਗਏ ਸਾਰੇ ਨੂੰ ਅੰਗ ਤਾਂ ਉਹਦੇ ਵਿੱਚ ਹੀ ਆਪੇ ਨਿਕਲੇ ਆਉਂਦੀ ਐ ਮਨ ਬਸੰਦ ਲੋ ਸੱਚ ਸੋ ਜੇ ਸੱਚੇ ਨਾਲ ਮਨ ਜੁੜਿਆ ਹੋਇਆ ਸੱਚ ਸੋ ਆ ਨਾਨਕ ਹੱਬੇ ਦੁਖੜੇ ਉਲਾਹੇ ਉਹ ਸਾਰੇ ਦੁਖੜੇ ਸਾੜ ਦਿੰਦਾ ਨਾਮ ਦਾ ਇੱਕ ਕਿਣਕਾਈ ਸੱਚ ਦਾ ਇੱਕ ਕਿਣਕਾਈ ਸਾਰਾ ਕੁਝ ਸਾੜ ਦਿੰਦਾ ਦੁੱਖੜੇ ਜਿੰਨੇ ਜੇ ਤਰੀਕੇ ਨਾਲ ਹੋਰਾ ਗੰਗ ਥਾਰੇ ਇਹਨਾਂ ਨੂੰ ਸਾੜ ਦਿੰਦੀ ਐ ਸਾਰੇ ਦੁੱਖ ਸਾੜ ਦਿੰਦਾ ਜਿਹੜੀ ਬ੍ਰਹਮਾ ਸਾੜ ਦਿੰਦੀ ਹੈ ਨਾ ਬ੍ਰਹਮਾ ਕੰਨ ਸੱਚੇ ਜਾਂ ਗਿਆਨ ਘਟ ਦੇ ਵਿੱਚ ਵੱਲਦਾ ਹੈ ਮੁਰ ਗਿਆਨ ਬਲਿਆ ਸਾਰੇ ਇਸ ਕੋ ਸੜ ਜਾਂਦਾ ਬਾਕੀ ਪਰ ਦੇਸੀ ਕੇ ਘਾ ਕਰ ਐ ਤੋਂ ਦਸ ਲੱਗਿਆ ਚਿੰਤਾ ਚਲ ਕੋਇਲਾ ਪਈ ਟਾਗੇ ਅੰਜਨ ਲਾਲ ਸਾਜ ਸੰਤੋਖ ਨਹੀਂ ਜੜਿਆ ਸੰਤੋਖ ਨਹੀਂ ਜੜਿਆ ਬਾਕੀ ਤਾਂ ਸਭ ਕੁਝ ਚਲ ਗਿਆ ਹਾ ਕੋਟ ਅੱਗਾ ਸਭ ਨਾਸ ਹੋਏ ਚਿਮਿਤ ਮਨ ਚਿੰਦੇ ਫਲ ਪਾਈਆਂ ਹਰਕੇ ਗੁਣ ਗਾਉ ਹਾ ਕੋਟ ਅਗਾ ਕਰੋੜਾ ਪਾਪ ਸਭ ਪਾਪ ਨੂੰ ਕਹਿੰਦੇ ਨੇ ਹੁਕਮ ਦਾ ਵਿਰੋਧ ਕਰਨ ਦੇ ਕਰੋੜਾਂ ਜਿਹੜੇ ਕਾਰਨ ਨੇ ਸਾਰੇ ਵਿਸਰ ਗਏ ਸਾਰੇ ਨਾਸ ਹੋ ਗਏ ਰੋਣਾ ਤਾਂ ਉਹ ਕਰਦੇ ਸੀ ਹੁਕਮ ਦਾ ਵਿਰੋਧ ਕਰਦੇ ਆਂ ਤੇ ਰੋੜਾਂ ਪਰ ਕਾਦੀ ਸਾਡੇ ਅੰਦਰ ਇੱਛਾਵਾਂ ਪੈਦਾ ਹੁੰਦੀਆਂ ਨੇ ਸਾਰਿਆਂ ਹੀ ਗੰਦੇ ਭਸਮ ਹੋ ਗਏ ਕੋਈ ਇੱਥੇ ਹੀ ਨਹੀਂ ਰਹੀ ਸਾਰੇ ਕਾਰਨ ਇੱਛਾ ਦੇ ਭਸਮ ਹੋ ਗਏ ਸਾਰਿਆਂ ਭਸਮ ਸਿਮਰਤ ਹਨ ਨਾਮ ਦੇ ਸਿਮਰਨ ਸਾਰੇ ਤਿਆਗ ਹੋ ਗਿਆ ਤਿਆਗ ਕਰਤਾ ਭਸਮ ਕਿਉਂ ਗਿਆ ਤਿਆਗ ਦਿੱਤੇ ਮਨ ਜਿੰਦੇ ਫਲ ਪਾਇਆ ਹਰ ਕੇ ਗੁਣ ਗਾਉਣ ਮਨ ਜਿੰਦੇ ਫਲ ਪਾਇਆ ਕੀ ਗਿਆਨ ਫਲ ਹੋ ਗਿਆ ਫਲ ਕੀ ਫਲ ਗਿਆਨ ਬਾਹੋਂ ਗੁਣ ਗਾਣ ਹਰ ਕੇ ਗੁਣ ਗਾਉਣ ਹਰ ਕਾ ਗੁਣੇ ਜਾਣ ਤੁਹਾਨੂੰ ਉਹਦੇ ਗੁਣਾਂ ਦਾ ਗਿਆਨ ਤੁਹਾਨੂੰ ਹੋ ਗਿਆ ਗੁਣ ਗਾਉ ਉਹ ਵੱਡਾ ਜਨਮ ਮਰਨ ਭੈ ਕਟੀਆਂ ਨੇਚਲ ਸੱਚ ਥਾਉ ਪੂਰਵ ਹੋਵੇ ਲਿਖਿਆ ਹਰ ਚਰਨ ਸਮਾਉ ਜਨਮ ਆਉਣਾ ਭੈ ਕਟਿਆ ਗਿਆ ਟਕੀ ਹੈ ਨੇਚਲ ਹੋ ਗਿਆ ਮਨ ਨੇ ਚਲੋ ਗਿਆ ਫਕ ਥਾਉ ਐਸਾ ਹੀ ਜਨਮ ਮਿਲ ਗਿਆ ਜਿਹੜੀ ਨਾਸਵੰਤ ਨਹੀਂ ਹੈ ਥਾਉ ਉਹ ਮਿਲ ਗਿਆ ਨਾਨਕ ਵੱਡਾ ਕਰਤਾ ਹਾ ਜਿੱਤੇ ਮਰਤਨ ਜਨਮ ਜਰਾ ਜਤ ਸਦਾ ਖੇੜਣ ਵਾਲਾ ਤੋਂ ਪ੍ਰਾਪਤ ਹੋ ਗਿਆ ਮਨ ਹੁਣ ਸਦਾ ਹੀ ਵਾਸਤੇ ਹੀ ਸਿੱਖ ਗਿਆ ਸਦਾ ਵਾਸਤੇ ਹੀ ਜਿੰਦਾ ਹੋ ਗਿਆ ਅਵਨਾਸ਼ੀ ਰਾਜ ਮੰਗੂ ਫਿਰ ਹੋ ਗਿਆ ਪੂਰਬ ਹੋਵੇ ਲਿਖਿਆ ਜੇ ਪਹਿਲਾਂ ਲਿਖਿਆ ਹੋਵੇ ਨਾ ਜਨਮ ਤੇ ਪੂਰਵ ਮੰਨਿਆ ਉਹ ਵੀ ਐਟ ਕੀ ਕੰਮ ਕਰਨਾ ਹੈ ਹਰ ਕਾਣਾ ਸਵਾਉ ਬਾਹਰ ਕਾਣਾ ਨੇ ਵੀ ਸਮਝ ਜਾਂਦਾ ਫਿਰ ਇਹ ਲਿਖਿਆ ਹੀ ਰਹੇ ਹਾਂ ਕਿਰਪਾ ਪ੍ਰਭ ਰਾਖ ਲਿਓ ਨਾਨਕ ਬਲ ਜਾਓ हां कृप ाप्रभु राख लेओ कृपा करके ए प्रभु मेनू रख लेओ अदंसान्दर तो मैं तेरे कुर्बान जाना मैं तो तेरे तो कुर्बान हां मेनू कुछ नहीं और चाहिए दा ना दुनिया ना दुनिया दा तान ना दुनिया दी बड़ाई तू चाहिदा है तेरे ते कुर्बान हां तू मैं नु अपने नाल जोड़ ले व मेनू बचा ले सब सादर से नानक ਅੱਗੇ ਠੀਕ ਹੈ ਜੀ ਇੱਥੇ ਪੰਜਵੀਂ ਪੌੜੀ ਸਮਾਪਤੀ ਹੈ ਜੀ